ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ ਨਾਨਕ ਜਿਉ ਮਥਣ ਮਾਧਾਣੀਆਂ ਤਿਉ ਮਥੇ ਧਰਮ ਰਾਇ ਪਾਪੀ ਕਰਮ ਕਮਾਉਂਦੇ ਕਿਹੋ ਜਿਹੜੇ ਹੁਕਮ ਦਾ ਵਿਰੋਧ ਕਰਦੇ ਨੇ ਜਿਹੜੇ ਆਪਣੇ ਪਾਲਣੇ ਚੱਲਦੇ ਨੇ ਗੱਲਾਂ ਚਾਹਦੇ ਨੇ ਉਹ ਕਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ ਸਾਰੇ ਨਾਇਕਲਾਬ ਕਰਦੇ ਰਹਿੰਦੇ ਨੇ ਆਏ ਕਿਉਂ ਹੋ ਗਿਆ ਉਹ ਕਿਉਂ ਨਹੀਂ ਹੋਇਆ ਆ ਨਹੀਂ ਮਿਲਿਆ ਸਾਨੂੰ ਉਹ ਨਹੀਂ ਮਿਲਿਆ ਉਹ ਪਾਪੀ ਕਰਮ ਹੈ ਪਾਪ ਕਰਮ ਕਰਦੇ ਨੇ ਉਹ ਉਹਨਾਂ ਬਲੋਧ ਕਰਦੇ ਨੇ ਕਰਦੇ ਹਾਏ ਹਾਏ ਹਾਏ ਕਲਾ ਕੋਈ ਕਰਦੇ ਨੇ ਨਾਲ ਕਿ ਜੋ ਮੱਥਣ ਮਦਾਨੀਆਂ ਤੇ ਉਹ ਮੱਥਾ ਧਰਮਰਾਇ ਮੱਥਾ ਧਰਮਰਾਇ ਐ ਮੱਥਾ ਧਰਮ ਜਿਵੇਂ خدا ਨੇ ਮੱਥੀ ਦੇ ਵਿੱਚੋਂੁੱਧ ਦੇ ਵਿੱਚੋਂ ਅਟਕੜ ਲੈਂਦਾ ਹੈ ਇਜ਼ਰਾਇਲ ਫਰੈਸਤਾ ਚਲ ਕੀੜੇ ਕਾਣੀ ਕਾਣੀ ਕੀੜੇ ਜਾਂਦੇ ਨੇ ਫਤ ਨਿਕਲ ਜਾਂਦਾ ਹਰ ਰਹਿ ਜਾਂਦੀ ਹੈ ਸਰੀਰ ਦੇ ਵਿੱਚੋਂ ਤਾਂ ਆਹ ਕੱਢ ਰਿਹਾ ਜਾਂਦਾ ਜਿਵੇਂ ਜਿਵੇਂ ਜੋ ਤੇਲ ਨਿਕਲ ਜਾਂਦਾ ਅੱਛੇ ਹਾਈ ਹਾਈ ਸਵੇਰੇ ਇੱਥੇ ਇੱਕ ਵਾਰ ਆਨ ਨਾਲ ਲਿਖਿਆ ਇੱਕ ਸਿਹਾਰੀ ਨਾਲ ਹੈ ਠੀਕ ਹੈ ਜੀ ਕਹਿੰਦਾ ਭਾਵੇਂ ਸੁਖ ਸ਼ਾਂਤੀ ਨਹੀਂ ਹੈ ਅੰਦਰ ਦੁਬਿਧਾ ਹੈ ਹਾਈ ਹੋਰ ਕੀ ਹੈ ਠੀਕ ਹੈ ਜੀ ਨਾਨਕ ਜਿਉ ਮੱਥਨ ਮਾਧਾਨੀਆਂ ਤਿਉ ਮੱਥੇ ਧਰਮ ਰਾਹੀ ਜਦ ਦੇ ਬਸ ਦੇ ਰਹੇ ਨੇ ਜੋ 파ਸਾ ਫੇਟ ਕਢ ਲਿਆ ਫਿਰ 파ਸਾ ਫੇਟ ਆਵਾਸਥਾ ਅੱਛਾ ਇਹ ਤਾਂ ਨਹੀਂ ਹੈਗਾ ਵੀ ਕੋਈ ਜਿਵੇਂ ਕਹਿੰਦੇ ਆ ਅੰਦਰ ਮਧਾਨੀ ਪਾ ਕੇ ਉਹਦੇ ਚ ਫਿਰ ਚੰਗਾਈ ਉਹਨਾਂ ਨੂੰ ਰੇੜਕਾ ਲਾਇਆ ਜਾਂਦਾ ਲੋਕ ਐ ਵੀ ਕਹਿੰਦੇ ਮਧਾਨੀ ਕਿੱਥੋਂ ਪੈਣਾ ਅਸਰੀਕ ਕੱਢਣੇ ਨਹੀਂ ਯੋਧਾ ਅਗਾ ਕੋ ਕੜਕਾਏ ਜਦ ਉਹ ਕਹਿੰਦੇ ਆ ਜੀ ਹੇ ਭਾਈ ਵਿਕਾਰੀਪੁਰਖ ਮਾੜੇ ਕੰਮ ਕਰਦੇ ਹਨ ਜਿਸ ਕਰਕੇ ਉਹ ਹਾਏ ਹਾਏ ਕਰਦੇ ਰਹਿੰਦੇ ਹਨ ਭਾਵ ਦੁਖੀ ਰਹਿੰਦੇ ਹਨ ਨਾਨਕ ਗੁਰੂ ਜੀ ਫਰਮਾਉਂਦੇ ਹਨ ਕਿ ਵਿਕਾਰੀਆਂ ਨੂੰ ਧਰਮ ਰਾਜ ਰਿੜਕੇਗਾ ਭਾਵ ਦੁੱਖ ਦੇਵੇਗਾ ਠੀਕ ਹੈ ਜੀ ਕਹਿੰਦਾ ਪਾਵਾ ਕਿ ਉਹਨਾਂ ਦਾ ਜੰਮਣ ਮਰਨ ਨਹੀਂ ਮੁੱਕਣਾ ਧਰਮ ਰਾਏ ਲਿਖਿਆ ਹੋਇਆ ਸੀ ਆਮ ਤਾਂ ਧਰਮ ਰਾਏ ਲਿਖਦੇ ਇੱਥੇ ਤਾਂ ਪਰ ਰਾਰਾ ਪੈਰ ਚ ਪਾਇਆ ਹੋਇਆ ਪੈਰ ਚ ਪਾਇਆ ਹੋਇਆ ਰਾਰਾ ਹਾਂ ਫਿਰ ਉਹਨੂੰ ਧਰਮੇ ਪੜਾਂਗੇ ਆਪਾਂ ਹਾਂਜੀ ਧਰਮ ਤਾਂ ਨਹੀਂ ਰਹਿੰਦਾ ਫਿਰ ਧਰਮ ਧਰਮ ਵਾਸਤੇ ਤਾਂ ਪੂਰਾ ਰਾਰਾ ਚਾਹੀਦਾ ਇਹ ਵੀ ਸ਼ਾਇਦ ਗਲਤੀ ਹੋਈ ਇਹਨਾਂ ਦੀ ਮਨ ਲੱਗਦਾ ਹਾਂ ਜਾਂ ਕੀ ਪਾਪ ਕਮਾਉਣ ਤੋਂ ਬਚਣਾ ਚਾਹੀਦਾ ਨਹੀਂ ਤਾਂ ਜੰਮਣ ਮਰਨ ਜੋ ਹੈ ਉਹਦਾ ਲੇਖਾ ਕੱਟ ਨਹੀਂ ਹੁੰਦਾ ਹਾਂਜੀ ਠੀਕ ਹੈ ਜੀ ਇੱਥੇ ਨੌਵੇਂ ਸ਼ਲੋਕ ਦੀ ਸਮਾਪਤੀ ਜੀ